ਸ਼ਲੋਕ ਮਹਲਾ ਤੀਜਾ ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ ਭੋ ਕਰ ਚੱਲ ਗਵਾਈ ਗੁਰ ਕੈ ਭੈ ਕਿ ਤ ਸ੍ਰੀ ਸਹਿਵਿਚ ਪਾਈ ਇਹਦਰ ਨੂੰ ਸੰਬੋਧਨ ਅੱਛਾ ਜੀ ਫਤਰਾ ਜ਼ੋਰ ਛੱਡ ਅੱਜ ਆਪਣੀ ਬੱਜੀ ਹੈ ਬੜੀ ਸਟਰੋਂਗ ਛੱਡਦੇ ਤੇ ਆਗਦੇ ਆਪਣੀ ਗੁਰਜੀਤ ਆਲ ਆਪਣੀ ਇੱਛਾ ਹੀ ਤੇ ਬਿਲਕੁਲ ਕੋਈ ਥੜੀ ਨਹੀਂ ਜੋੜ ਛੱਡ ਤੂੰ ਭੋਗ ਕਰ ਤੂੰ ਕੁਦਰਤ ਦੇ ਭੋਗ ਵਿੱਚ ਹੈ ਸਿਰਦੇ ਹੋ ਭੋਗ ਵਿੱਚ ਹੈ ਅੱਛਾ ਜੀ ਚੱਲ ਗਵਾਇਆ ਜੇ ਤੱਕ ਚੱਲ ਜਿਹੜਿਆ ਹੈ ਚੱਲ ੱਲਾ ਮੈਂ ਕਰਤੇ ਛੱਡੂਗਾ ਆਜ ਜਿੱਤੇ ਕਦੇ ਵੀ ਹੋਣਾ ਤੂੰ ਪਿੱਛੇ ਲੱਗ ਕੇ ਤੇ ਤੂੰ ਭੋਗ ਕਰ ਤੂੰ ਧਰ ਹੁਕਮ ਮੇਰੇ ਕਰ ਸਕਦਾ ਇਹ ਮਨ ਨੂੰ ਜੀਵ ਆਤਮਾ ਜੀਵ ਆਤਮਾ ਜੀਵ ਆਤਮਾ ਠੀਕ ਹੈ ਝਲ ਗਵਾਏ ਕੋਈ ਵੀ ਚੱਲੇ ਆਇਆ ਜੰਮ ਤੇਹੀ ਚੱਲ ਚੱਲਿਆ ਰਹਿੰਦਾ ਸੇ ਕਰਦੂ ਕਰਦੂ ਕਰਦੂ ਕੱਗ ਰੋਜ਼ ਜਾਣੇ ਮੇਰਾ ਕੁਝ ਚੱਲੇ ਆ ਤੇਨੂੰ ਬਸਾਂ ਬਦੰਗ ਤੇ ਫਿਰਦਾ ਮੈਂ ਕਰਦੂ ਆਪ ੁਰਕਰ ਦਾ ਇਹ ਬਚਨ ਵਾਲਾ ਦਾ ਪਤਾ ਨਹੀਂ ਕਿ ਕਿੱਦਾਂ ਕਰ ਗਏ ਕਹਾਣੀ ਨਹੀਂ ਹੈ ਲੱਖਾਂ ਸਾੜੀਏ ਦੇ ਲੱਖਾਂ ਚਰ ਗਏ ਉੱਤੇ ਠੀਕ ਹੈ ਜੀ ਤਾਂ ਦੀ ਪ੍ਰਾਪਤੀ ਭਾਏ ਜਿਹੜੀ ਮੰਦੀ ਹੈ ਠੀਕ ਹੈ ਜੀ ਦੇ ਕੋਪਾ ਜਦੋਂ ਹੁਕਮ ਚ ਆ ਗਿਆ ਹੁਕਮ ਤੇ ਦਰਦਾ ਸੀ ਪਤਾ ਵੀ ਰਖਸ਼ਕ ਹਾਂ ਠੀਕ ਹੈ ਜੀ ਮਨ ਕਠੋਰ ਸ਼ਬਦ ਭੇਜ ਤੂੰ ਸ਼ਾਂਤ ਵਸੈ ਮਨ ਆਏ ਕੋਈ ਨਾ ਕਠੋਰ ਹੈ ਸ਼ਬਦ ਦੁਆਰਾ ਆਪਣੇ ਆਪ ਚ ਆਕਰ ਸ਼ਬਦ ਨਾਲ ਆਪਣੇ ਆਪ ਨੂੰ ਭੇਜ ਬਿਲ ਸ਼ਬਦ ਭੇਜ ਤੂੰ ਸ਼ਾਂਤੀ ਵਸੈ ਮਨ ਆਏ ਸ਼ਾਂਤੀ ਬਸੇ ਬਣਾਏ ਤੇਰੇ ਗੁਰ ਦੀ ਸਰੂਪੀ ਬਸ ਜੂਗੀ ਸ਼ਾਂਤੀ ਸ਼ਬਦ ਦੇ ਪੇੜ ਨਾਲ ਹੈ ਸ਼ਬਦ ਦਾ ਪੇੜ ਖੁੱਲੂਗਾ ਸ਼ਾਂਤੀ ਆਊਗੀ ਸ਼ਬਦ ਦਾ ਸਰਾਖ ਹੋ ਜਾਊਗਾ ਪਰਮ ਦਾ ਸਰਾਖ ਪਰਦਾ ਹਰ ਸ਼ਾਂਤੀ ਵਿੱਚ ਰਹਿ ਕੇ ਜਿਹੜਾ ਕੰਮ ਕਰਦਾ ਉਹ ਗੁਰਦਾਰੇ ਵਿੱਚ ਲੇਖੇ ਚ ਤੇ ਕਬੂਲ ਹੋ ਜਾਂਦਾ ਠੀਕ ਹੈ ਸਾ ਖਸਮ ਪਾਈ ਥਾਈ ਇੱਥੇ ਪਤਾ ਨਹੀਂ ਸਾ ਕਿਉਂ ਆਇਆ ਕਿਉਂਕਿ ਖਸਮ ਤਾਂ ਹੈਗਾ ਪੁਰਸ਼ਵਾਚਕ ਸਾਤ ਆਮ ਇਸਤਰੀਵਾਚਕ ਸ਼ਬਦ ਨਾਲ ਆਉਂਦਾ ਹਮੇਸ਼ਾ ਕੋਈ ਇਸਤਰੀਵਾਚਕ ਸ਼ਬਦ ਹੋਊਗਾ ਸਾ ਬੁੱਧੀ ਹੋਇਆ ਉਸ ਤਰ੍ਹਾਂ ਆਉਂਦਾ ਪਰ ਇੱਥੇ ਸਾਖ ਖਸਮ ਨਾਲ ਆਇਆ ਹੋਇਆ। ਲੋ ਤੇਗਲਾਂ ਨੇ ਰੂਤੀ ਨਾ ਨਾਨਕ ਕਾਮ ਕਰੋਧ ਕਿਨੇ ਨਾ ਪਾਇਓ ਪੁੱਛੋ ਗਿਆਨੀ ਜਾਈ। ਕਾਹਬ ਕਰੋਧ ਦੀ ਕਿਨੇ ਨਾ ਪਾਇਓ ਕਾਹਤ ਕਰੋਧ ਤੇ ਹੁਗਦੇ ਹਾਂ। ਹਾਂਜੀ। ਕਾਹ ਕਰੋਧ ਦੀ ਹਾਜ਼ਰੀ ਕਿਨੇ ਨਾ ਪਾਇਓ। ਕਰੋਧ ਦੀ ਕੋਈ ਪਾਸ ਕਰਦਾ ਕਾਬੀ ਦੀ ਕੋਈ ਪਾਸ ਕਰਦਾ। ਹਾਂ। ਕਾਹ ਕਰੋਧ ਤਾਂ ਜੇ ਬਲੋ ਪ੍ਰੈਕਟਿਕ ਉਛਲੇ ਰੋਏਗੀ ਫੁੱਟੋ ਗਿਆ ਨਹੀਂ ਜਾਇ ਜਲਦੀ ਲੋਕਾਂ ਨੂੰ ਪੁੱਤ ਨਹੀਂ ਆਵੇ ਅਚਾ ਕਦੇ ਨਹੀਂ ਹੋਇਆ ਕੰਮ ਕੋਈ ਦਿਨ ਬੀਤ ਗਿਆ ਹੋਵੇ ਹਾਂਜੀ ਮਹੱਲਾ ਤੀਜਾ ਮਨਮੁਖ ਮਾਇਆ ਮੋਹ ਹੈ ਨਾਮ ਨਾ ਲਗੋ ਕੂੜ ਕਮਾਵੇ ਕੂੜ ਸੰਗਰਹ ਕੂੜ ਕਰੇ ਆਹਾਰ ਭਾਇਆ ਨਾਲ ਪਿਆਰ ਹੈ ਬੁੱਲਖਰ ਠੀਕ ਹੈ ਨਾਮ ਨਾ ਲਗੋ ਪਿਆਰ ਨਾਮ ਨਾਲ ਬਹੁਤ ਵਧੀਆ ਲਿਖਾ ਲੀਏ ਹੈ ਉਹਦਾ ਨਾਮ ਦਾ ਪਿਆਰ ਠੀਕ ਹੈ ਤੇ ਨਾਮ ਚੇਤਨ ਹੈ ਹਾਂ ਨਾਮ ਚੇਤਨ ਵੀ ਇਹ ਜੜ ਵੀ ਹੈ ਨਾਮ ਜਿੱਥੇ ਗਿਆਨ ਨਾਲ ਉੱਥੇ ਜੜ ਜੀ ਜਿਹੜਾ ਬਾਣੀ ਆਈ ਨਾ ਸੋਵਾ ਬਾਣੀ ਆਈ ਉਹ ਚੇਤ ਹੈ ਠੀਕ ਹੈ ਕੂੜ ਕਮਾਵੇ ਕੂੜ ਸੰਗਰਹਿ ਕੂੜ ਆਹਾਰ ਕੂੜ ਕਮਾਵੇ ਕੂੜ ਸੰਗਰਹਿ ਜੇ ਰੋਇ ਉਹ ਨਾ ਪਾਉ ਹੋਊਗਾ ਨ ਕੂੜੇ ਕੂੜੇ ਸੱਤਾਂ ਦਾ ਕੂੜ ਸੰਗਰਹਿ ਕੂੜੋਂ ਖਰੇ ਆਹ ਹਾਂਜੀ ਕੂੜੇ ਉਹ ਤੇ ਖੁਰਾਕ ਹੈ ਮਾਇਆ ਧਨ ਸੰਚ ਮਰੈ ਅੰਤੇ ਹੋਏ ਸਭ ਛਾਰ ਵਿਖ ਮਾਇਆ ਅਗੜ ਜਲ ਮਾਇਆ ਵਿਖਮਾਇਆ ਤੁਨ ਇਕੱਠਾ ਸਾਲਨ ਦੇ ਭਰ ਜਾਂਦੇ ਨੇ। ਹੂੰ ਹੂੰ। ਤੇ ਚੋ ਆਪ ਸਵਾ ਹੋ ਜਾਂਦੇ ਨੇ। ਸੰਤਤਲੇ ਪਰ ਅਲਨ ਕਿਤੇ ਹੋ ਜਾਂਦੇ। ਬੁੱਤੇ ਹੋਈ ਛਾਰ ਹੰਦ ਤੱਕ ਛਾਰ ਹੋ ਜਾਂਦੇ ਨੇ। ਬਾਰੇ ਜਾਂਦੇ ਨੇ। ਠੀਕ ਹੈ। ਜੇ ਸਖਤ ਕਰਕੇ ਛਾਰ ਹੋ ਜਾਂਦੇ ਨੇ। ਕਰਮ ਧਰਮ ਸੁਚ ਸੰਜਮ ਕਰੈ ਵਿਕਾਰ ਕਰਮ ਵੀ ਕਰਦੇ ਨੇ ਲੋਕ ਸੋਚ ਤੇ ਸੰਜਮ ਵੀ ਕਰਦੇ ਨੇ ਲੋਕ ਪਰ ਅੰਦਰੋਂ ਉਹ ਬੁਕਾਰ ਜਿਹੜਾ ਹੈਗਾ ਲੋਭ ਰੂਪੀ ਬੁਕਾਰ ਉਹ ਦੀ ਪਿਆਗ ਉਹ ਉਹ ਵੀ ਹੁੰਦਾ ਹੈ। ਠੀਕ ਹੈ। ਸੱਜਾ ਹੁੰਦੇ ਹੋਏ ਵੀ ਕਰਮ ਵੀ ਤਰਨ ਦੀ ਤਜਰਬ ਕਰਦੇ ਹੀ ਲੋਭ ਬੁਕਾਰ ਭਗਤੀ ਕਰੀ ਜਾਂਦਾ ਹੈ। ਹੀ ਕੋਪਣ ਭਗਤੀ ਆਲੇ ਪਾਸੇ ਸਭ ਕੀਤਾ ਰਾਇ ਰਚ ਜੇ ਮਨਮੁਖ ਕਮਾਵੇ ਸੋ ਥਾਇ ਨਾ ਪਵੈ ਦਰਗੈ ਹੋਏ ਖوار ਵਰਮੁਗਿਓ ਕੋ ਬਰੀ ਕਰਦਾ ਥਾਇ ਨਹੀਂ ਪੈਦੀ ਦਰਗੈ ਹੋਏ ਹੁੰਦਾ ਕੋ ਕਿਸੇ ਗਲਤੀ ਜਿਨੀ ਆਉਂਦੀ ਅਸਲ ਲੋਭ ਹੈ ਫਰੀ ਜਾਂਦਾ ਕੋਈ ਤਾਂ ਕੋਈ ਰਫੈ ਜਾਉ ਨਾ ਬੇਦੀ ਕੋਈ ਥਾਇ ਦੀ ਉਜੂਰ ਰਿਗਾਲ ਪਕਤੀਓ ਬੈਠਾ ਹੋਏ ਖੋਲ ਖੋਲ ਫੇਰ ਹੁੰਦਾ ਯਾਰ ਕੋੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਹਾਂ ਆਪੇ ਬਾਣੀ ਬਾਣੀ ਵੀ ਆਵੇ ਵਾਲਾ ਆਪ ਕੋਲ ਪਰ ਪੱਟ ਖੰਡ ਪਰ ਪੜ ਖੰਡ ਹੈ ਜੀ ਤੇ ਚੇਤਨ ਪਰ ਪੜਨਾ ਹੈਗਾ ਨਾ ਆ ਅੱਛਾ ਜੀ ਖੰਡ ਦਾ ਤੇ ਖੰਡਰ ਪਰ ਪੜ ਤੱਕ ਆਪਣੇ ਹੀ ਰਹਿੰਦੇ ਅੱਛਾ ਹੋਇਆ ਹੋਇਆ ਉਹ ਖੰਡ ਹੈ ਜੀ ਰੂਪੀ ਖੰਡ ਹੈ ਇਹ ਹੋਇਆ ਰੰਗ ਤੇ ਉੱਤੇ ਜੇ ਲੋ ਖੜਾ ਹਾਂ ਉਹ ਸਿਰ ਭਾਵੇਂ ਜੋ ਹਾਂਜੀ ਆਪ ਸਮੁੰਦ ਆਪ ਹੈ ਸਾਗਰ ਆਪ ਹੀ ਵਿੱਚ ਰਤਨ ਧਰੇ ਆਪ ਜਮੁੰਦ ਆਪ ਦਾ ਸਾਗਰ ਆਪੇ ਸੁਬਦ ਸੁਬਦ ਸਾਗਰ ਹੂੰ ਹੂੰ ਠੀਕ ਹੈ ਜੀ ਬਾਹਰ ਜਿਹੜਾ ਹੈ ਬਾਹਰ ਉਹ ਵਿੱਚ ਉਹ ਵੱਡਾ ਹੈ ਸਾਗਰ ਦੀ ਕੋਈ ਬਾਉਂਡਰੀ ਨਹੀਂ ਹੁੰਦੀ ਦੂਰ ਦੀ ਬਾਰਡਰੀ ਹੁੰਦੀ ਇਹਦਾ ਰਚਨਾ ਆਜੀ ਜਲੀ ਇਹ ਤਾਂ ਛੋਕ ਸਾਗਰ ਦੇ ਵਿੱਚ ਹੀ ਛੋਟਾ ਹੈ ਅਸਰ ਜੀਪਾਪ ਸਾਗਰ ਛੋਕ ਸਾਗਰ ਦੇ ਵਿੱਚ ਹੈ ਹਾਂ ਛੋਕ ਸਾਗਰ ਜਿਹੜਾ ਵੱਡਾ ਹੈ ਉਹਦੀ ਕੋਈ ਬੋਲ ਨੀ ਭਵ ਸਾਗਰ ਦੀ ਬੋਲਦੀ ਸਮੁੰਦਰ ਆਪਰੇ ਇਹਦੇ ਰਤਨ ਕਰੇ ਹਾਂਜੀ ਅਗੇ ਦੇ ਰਤਨ ਵੀ ਹੋਏ ਨੇ ਗੁਰਬੰਦੀ ਦਾ ਇੱਥੇ ਪ੍ਰਕਾਸ਼ ਹੈ ਗੁਰਬੰਦੀਏ ਕੌਣ ਲੋਕ ਕਹੁੰਦੇ ਨੇ ਇਹ ਆਪੇ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖੀ ਕਰੇ ਹਰੇ ਆਪ ਲਹਾਏ ਆਪੇ ਦਰਦ ਕੇਸਨ ਪਖੀ ਜਿਸ ਨੂੰ ਬਚਾਣ ਲੈ ਤੇ ਆਪ ਤੇਰੀ ਕਿਰਪਾ ਲੋ ਬੰਦੇ ਫਰੇ ਜਿਸ ਪਾ ਜੀ ਨਾ ਹਰ ਨੂੰ ਬਚਾ ਦਰ ਤਰਤਾ ਤੇ ਤੇਰੀ ਕਿਰਪਾ ਲੋ ਦੋਸ ਰਸਤੇ ਚ ਮੱਤੀ ਪਰ ਇਹ ਸਾਰੇ ਜਾਏ ਤਾਂ ਨਿਕਲਿਆ ਚੱਲਿਆ ਜਾਣਾ ਨਹੀਂ ਕਿਰਪਾ ਹੋ ਜਾਂਦੀ ਹੈ ਬੰਦੇ ਹਾਂ ਜੀ ਜਿਸ ਗੁਰਮੁਖੀ ਕਰੇ ਹਰੇ ਜਿਸ ਗੁਰਮੁਖੀ ਕਰੇ ਹਰੇ ਗੁਰੂ ਨੂੰ ਹਰੇ ਕਰਦਾ ਗੁਰੂ ਪ੍ਰਗਟ ਕਰਦਾ ਹਾਂਜੀ ਗੁਰੂ ਕੀ ਪਰਮੇਸ਼ਰ ਨੂੰ ਪ੍ਰਗਟ ਕਰਦਾ ਹੈ ਪਰਮੇਸ਼ਰ ਨੂੰ ਪ੍ਰਗਟ ਕਰਦਾ ਗੁਰੂ ਦਾ ਪਰਪੇ ਪ੍ਰਗਟ ਕਰਦਾ ਆਪ ਦੂਜੀ ਕਰਦਾ ਆਪ ਦੂਜੀ ਕਹਿਣਾ ਬਈ ਹੈਗਾ ਕੁਝ ਕੋਈ ਕਹਿਣਾ ਉਹਦਾ ਕਹਿਣਾ ਹੋਈ ਹੈ ਸਭ ਕੁਝ ਕੱਟ ਵਾਲਾ ਸੇ ਆਪੇ ਪੌਜਲ ਆਪੇ ਬੋਇਤਾ ਆਪੇ ਕੇਵੜ ਆਪ ਆਪੇ ਗੋਹਤਾ ਆਪੇ ਖੇਵਟਾ ਆਪੇ ਸਭ ਕੁਝ ਕੀਤਾ ਲੋ ਅੱਛਾ ਜੀ ਜਲ ਵਿੱਚ ਉਹਦੇ ਵਿੱਚ ਹੀ ਆ ਜਲ ਕਿਹਦੇ ਬਾਹਰ ਹੈ ਉਹ ਇਕੱਠੇ ਹੀ ਰਹਿੰਦੇ ਦੀ ਹੈ ਹੋਇਆ ਜਦੋਂ ਜਲ ਬਾਰੇ ਵਿੱਚ ਕੇ ਫੇਰੋ ਕੀ ਆ ਜਾਂਦਾ ਕੁਬ ਕੇ ਫੇਰੋ ਕੀ ਆ ਜਾਂਦਾ ਉੱਥੇ ਕੁਬੀ ਜਾਂਦਾ ਉਹ ਪੋਛਿਆ ਫਿਰ ਉਹ ਇਤਰਾਸਤਾ ਦਾ ਸੰਦਗੀ ਬਾਲ ਦੇ ਜਾਂ ਫਿਰ ਬਾਲ ਦੇ ਜਾਂਦਾ ਆਪੇ ਕੋ ਹਟਾਓ ਪਾਣੀ ਕੋ ਬੁਝਾਉਂਦੇ ਕਹਿ ਦੇ ਦੇ ਉਧਰ ਆ ਕੇ ਠੀਕ ਹੈ ਜੀ ਉਹ ਕੋਈ ਕੋਈ ਤਾਂ ਹੀ ਕੇ ਉਹ ਕੱਢ ਕੇ ਲਿਆ ਸਕਦਾ ਆਪੇ ਖੇਵਟ ਖੇਵਟ ਦੀ ਇੱਥੇ ਜਬਲਾ ਹੁੰਦਾ ਖੇਵਟ ਵੀ ਆਪੇ ਠੀਕ ਆਪ ਤਰੇ ਆਪ ਦਰਬਾਰ ਵਾਲਾ ਵੀ ਆਪ ਠੀਕ ਹੈ ਇਹ ਫਿਰ ਦੱਸਿਆ ਵੀ ਜਿੰਨਾ ਇਹ ਸੁੱਤਾ ਹੈ ਜਿੰਨਾ ਇਹ ਜਾਗਦਾ ਉਹੀ ਸਥਿਤੀ ਦੇ ਸਾਹਮਣੇ ਇਹਦੇ ਨੌ ਹਨ ਜੀ ਇਹਦਾ ਨਾਮ ਵੀ ਦੋ ਇਹਨਾਂ ਦੇ ਇਹ ਕਿਵੇਂ ਹੈ ਕੱਲਾ ਇੱਕ ਸਾ벗 ਹਰ ਜਗ੍ਹਾ ਤਲਬੜਾ ਵੀ ਆਪ ਹੈ ਤਰਫ ਦਾ ਜਗਨ ਕਰਨ ਵਾਲਾ ਵੀ ਆਪ ਹੈ ਚਿਤਰਾਉਣ ਵੀ ਆਪ ਹੈ ਰੋਣ ਵਾਲਾ ਸਭ ਤੇ ਹੂੰ ਹੂੰ ਤਲਬੜਾ ਅਧੂਰਾ ਹੈ ਜੇ ਕਰ ਜੂਗਾ ਇਹ ਵੀ ਪੂਰਾ ਹੋ ਜਾਊਗਾ ਹੂੰ ਹੂੰ ਆਪੇ ਕਰੇ ਕਿਰਾਏ ਕਰਤਾ ਅਵਰ ਨਾ ਦੂਜਾ ਤੁਜੈ ਸਰੇ ਸਤਿਪੁਰ ਬਾਪੇ ਕਰਦਾ ਆਪੇ ਕਰਉਂਦਾ ਕਰਦਾ ਵੀ ਆਪ ਹੈ ਛੱਬ ਜੀ ਹੈ ਕਰਾਉਂਦਾ ਬੰਸਤੇ ਤੇ ਕਰਾਉਂਦਾ ਜੇ ਤੇ ਕਰਾਉਂਦਾ ਕਰਦਾ ਕਰਦਾ ਕਰਦਾ ਕਰਾਉਂਦਾ ਹੀ ਕਰਾਉਂਦਾ ਨਾ ਹੋਈ ਇਸ ਕਰਕੇ ਜੁਬੇਵਾਰੀ ਕਰ ਵੀ ਹੁੰਦੀ ਹੈ ਜਿਹੜਾ ਕਰਾਉਂਦਾ ਜੁਬੇਵਾਰੀ ਹੁੰਦੀ ਹੈ ਉਹਦਾ ਬਹੁਤ ਭਾਰ ਹੋਊਗਾ ਕਰਨ ਵਾਲੇ ਨੂੰ ਕੁਝ ਪਾਪ ਨਹੀਂ ਠੀਕ ਹੈ ਜੀ ਪਾਪ ਸੂਰ ਆਪੇ ਕਰੇ ਕਿਰਾਏ ਕਰਤਾ ਅਵਰਨਾ ਦੂਜਾ ਤੁਜੇ ਸਰੇ ਅਵਰਨਾ ਨ ਦੂਜਾ ਤੁਝੈ ਸਰੇ ਹੋਵੇ ਕੋਈ ਨੀ ਹੈਗਾ ਤੇਰੇ ਸਾਹਮਣੇ ਤੁਝਾ ਕੋਈ ਕੋਲ ਖੰਦੀ ਕਰ ਸਕਦਾ ਤੇ ਤੋ ਰੋਗ ਨ ਖਰਾ ਸਕਦਾ ਕਰਤੇ ਤੋਂ ਆਵਾ ਕੋਈ ਤੇਰੇ ਤੇ ਰੋਗ ਨ ਕਰਾ ਲਵੇ ਕੁਛ ਇਹ ਵੀ ਨਹੀਂ ਹੋ ਸਕਦਾ ਜ਼ਬਰਦਸਤੀ ਤੇ ਤੋ ਕਰਾ ਲਵੇ ਕੋਈ ਨਹੀਂ ਦਾ ਸੰਦਸਤ ਕੋਈ ਤੇ ਸਦੀ ਕੁਛ ਠੀਕ ਹੈ ਜੀ ਇੱਥੇ ਨੌਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ <s>